कई कोट खानी और खंड कई कोट आकाश ब्रह्मांड कई कोट खानी और खंड कई कोट आकाश ब्रह्मांड खानियां चार नहीं आणा कई कोट चार खानियां ने सारे संसार छ कई कोट ओ तो कह ना कई करोड़ खानी और खट ने वे होण पूरे संसार ने लोग ਰਿਵਾਨ ਲਵਲਾਂ ਜਿਹੜੇ ਬੈਠੇ ਦੇ ਸੈਂਤਾਨ ਲਵਲਾਂ ਕਈ ਫੋਟ ਜਿਹੜੇ ਖਾਣੀ ਔਰ ਖਾਣੇ ਕਿਥੇ ਕਿਥੇ ਦੇ ਕੇ ਇਹਦੀ ਜਾਇ ਇਹਨਾਂ ਨੇ ਜਾ ਕੇ ਨਹੀਂ ਉਸੇ ਪੁੱਛੀ ਨਹੀਂ ਕੀਤੀ ਇਹਦਾ ਤਾਂ ਪਰਮੇਸ਼ਰ ਨੇ ਦੱਸਿਆ ਜਿਹਨੇ ਬਣਾਈ ਉਹਨੇ ਕਾਇਆ ਕਹਦੇ ਕਾਇਆ ਤਾਂ ਉਹਨੇ ਕਾਇਆ ਤਾਂ ਤੇ ਇਹੋ ਸੈਂਤਾਨ ਨੂੰ ਵੀ ਸ਼ਾਕਾ ਵੀ ਹੋਤਾ ਸੀ ਹੋਣੀ ਇਹਨਾਂ ਨੂੰ ਸ਼ਾਕਾ ਹੋਣਾ ਦੱਸਤਾ ਵੀ ਹੈ ਗੁਰਬਾਣੀ ਉਹਨਾਂ ਦੀ ਜਿਹੜੀ ਹੈ ਸ਼ੰਕਾਉਮ ਸਦਕਾ ਦਿਓ ਤੁਹਾਡੀ ਸ਼ੰਕਾ ਠੀਕ ਹੈ ਹੈਗੀ ਹੱਸ ਪਹਿਲ ਲਭ ਲੋ ਤੁਸੀਂ ਆਪਣੇ ਤਰੀਕੇ ਨਾਲ ਲੱਭਣਿਆ ਲੱਭ ਲੋ ਨਹੀਂ ਕਿ ਮੈਂ ਇਹਨਾਂ ਨੇ ਦਿਖਾ ਵੀ ਦਿੱਤੀ ਵੀ ਦਿੱਤੀ ਕਈ ਕੋਟ ਖਾਣੀ ਔਰ ਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਆਕਾਸ਼ ਬ੍ਰਹਿਮੰਡ ਉਹ ਖੰਡ ਦਾ ਇਹ ਹੈ ਨਾ ਜੀਵ ਖੰਡ ਜੋ ਜੀਦਾ ਗਿਆਨ ਖੰਡਾ ਤਾਂ ਉਹ ਖੰਡ ਹੈ ਨਾ ਪੂਰਣ ਉਹ ਜਿਹੜਾ ਪੂਰਣ ਬ੍ਰह्म ਦੀ ਅਵਸਥਾ ਤੋਂ ਖੰਡਤ ਅਵਸਥਾ ਚ ਹੈ ਉਹ ਖੰਡ ਹੈ ਖੰਡ ਦੋ ਟੁਕੜੇ ਨਹੀਂ ਹੁੰਦੇ ਤੇਰਾ ਜਿੱਥੇ ਤੇਰਾ ਕੁਛ ਸਜ ਕੁਛ ਸਜ ਚੰਦੜਾ ਗਿਆਨ ਖੰਡਤ ਹੋਇਆ ਹੈ ਅਗਲ ਖੰਡਤ ਹੋਈ ਹੋਈ ਹੈ ਰੋਸ਼ਨੀ ਖੰਡਤ ਹੋਈ ਹੋਈ ਹੈ ਖਾਣੀ ਵਾਲ ਖੰਡ ਰੱਖਣਾ ਦਾਲ ਨਹੀਂ ਗੋਲ ਕਰ ਇਹਨੂੰ ਅਦਾਲ ਅਸੀਂ ਕਹਿੰਦੇ ਢਾਲ ਅੰਦਰ ਹੋਇਆ ਇਹ ਬਾਹਰ ਨਹੀਂ ਹੁੰਦੀ ਜੇ ਬਾਹਰੋਂ ਦਾਲ ਮੰਦੀ ਹੈ ਇੱਕ ਹੋਇਆ ਇੱਕ ਹੋ ਕੇ ਗੁਦੀ ਦੀ ਬਾਹਰ ਵਾਲੀ ਦਾਲ ਇਹ ਅੰਦਰੇ ਦੋ ਹੋਏ ਨੇ ਅੰਦਰੋਂ ਇੱਕ ਹੋ ਕੇ ਬਾਹਰਲਾ ਉਹ ਆਉਂ ਕੇ ਹੁੰਦਾ ਛਿਲਕੇ ਤੋਂ ਬਾਅਦ ਅੰਦਰ ਦਾ ਦੋ ਹੈ ਉਹ ਛਿਲਕੇ ਤੋਂ ਬਾਅਦ ਦੋ ਹੈ ਅਜੋਹਾ ਨੇ ਆਪਣੇ ਆਪ ਨੂੰ ਕਹਿਤਾ ਵੀ ਅਸੀਂ ਦੋ ਦੋਗੇ ਜੇ ਕਹਤਾ ਸੀ ਜੇ ਬਾਹਲਾ ਪਾਸਾ ਦੇਖਦੇ ਨੇ ਤਾਂ ਇੱਕਾਂ ਦੇ ਦੇਖਦੇ ਨੇ ਤਾਂ ਦੋ ਨੇ ਜੇ ਦਾਰ ਦੇ ਦੋ ਪਾਸੇ ਜੇ ਜੇ ਉਹ ਆਪਸ ਵਿੱਚ ਹੀ ਦੇਖਦੇ ਨੇ ਤਾਂ ਇੱਕ ਜਦੋਂ ਦੋ ਨੇ ਜੇ ਸੜੇ ਛਲਕਾ ਦੇਖਦੇ ਨੇ ਫਿਰ ਦਿੱਕਾ ਜਦੋਂ ਅਗੇ ਜਿੰਨਾ ਸਾਡੇ ਕੋਲ ਗਿਆਨ ਹੈ ਉਹਦੇ ਨਾਲ ਦੇਖਦੇ ਆ ਨਾ ਫਿਰ ਦੋ ਜਿੱਦ ਤੱਕ ਕਰ ਰਿਹਾ ਜਿੰਨਾ ਤਾਂ ਸਾਡੇ ਚੰਨ ਨੇ ਨਾ ਉਹਦੇ ਵਿੱਚ ਅਸੀਂ ਦੋ ਆ ਚਾਹਨਾ ਵੀ ਵਾਹਨੇ ਰੱਬ ਇਹ ਲੱਗਦੀ ਨਾ ਕੋਸੇ ਚਾਹਨਾ ਇੱਕ ਸਾਡਾ ਆਪਣੇ ਦਰਵਾਜ਼ੇ ਤੋਂ ਪੱਲੇ ਪਾਸੇ ਜਿੱਥੇ ਆਪਣੀ ਲਾਈਟ ਹੈ ਪਰ ਇਹ ਦੇਹਰਾ ਪਰੂ ਦੀਦਾ ਹੈ ਫਿਰ ਦੋ ਹੋ ਗਏ ਮੇਰਾ ਬੰਮਾ ਤਾਂ ਵੀ ਹੁਣ ਰਾਤ ਹੈ ਰਾਤ ਕਿਉਂ ਹੈ ਇਹ ਦੰਨਿਆ ਰਾਤ ਹੈ ਜੇ ਆਪਣੇ ਦਰਵਾਜ਼ੇ ਤੋਂ ਪਰੇ ਲਾਈਟ ਤੋਂ ਪਰੇ ਦਿਰਾ ਹੈ ਵਜੂਦ ਹੈ ਤੇ ਰਾਤ ਹੈ ਜੇ ਸਾਡੇ ਗਿਆਨ ਤੋਂ ਪਰੇ ਕੁਝ ਐਸਾ ਹੈ ਜਿਹਦਾ ਸਾਨੂੰ ਨਹੀਂ ਗਿਆਨ ਇਹ ਦੰਦੇ ਹੀ ਰਾਤ ਹੈ ਇਹ ਦੰਦੇ ਹੀ ਸਾਰੀ ਜੀਵਨ ਰਾਤ ਹੈ ਗਿਆਨਤਾ ਰਾਤ ਹੈ ਜੇ ਕੁਝ ਵੀ ਹੈ ਗਿਆਨਤਾ ਜਿੰਨਾ ਜਦ ਸਾਡੇ ਅੰਦਰ ਰਾਤ ਹੈ ਜਦੋਂ ਸੂਰਜ ਚੜ੍ਹਿਆ ਆ ਗਿਆ ਗਿਆਨਤਾ ਰਹੀ ਹੋਈ ਨਹੀਂ ਉਤਨੋਂ ਉਹ ਕਹੀ ਕੋਟ ਖਾਣੀ ਔਰ ਸਾਰੇ ਦੇਖਣ ਲੱਗ ਜਾਂਦੇ ਸਾਰੇ ਦੇਖਣ ਲੱਗ ਜਾਂਣਗੇ ਦ੍ਰਿਸ਼ਟੀ ਉਹ ਤੇ ਤੱਕਦੀ ਹੋ ਜੂ ਬੁੱਧੀ ਸਾਰੇ ਦੇਖਣ ਲੱਗ ਜਾਂਦੇ ਇੱਥੋਂ ਬੱਡੇ ਖਾਣੀ ਔਰ ਖਾਣ ਆਟੋਮੈਟਿਕ ਸਿਸਟਮ ਕਿਵੇਂ ਚੱਲਦਾ ਕਿਉਂ ਹੋਇਆ ਇਹ ਆਟੋਮੈਟਿਕ ਖਾਣੀ ਔਰ ਖਾਣ ਬਣਾਇਆ ਜਾਂਦਾ ਕਿ ਤੋ ਪੁੱਛ ਆਉਂਦਾ ਕਿ ਤੋ ਆਉਂਦਾ ਕਿ ਇੱਕ ਪ੍ਰੈਨਰ ਦਾ ਦੁਆਤੇ ਅਸਰ ਪੈ ਰਿਹਾ ਇਹ ਉਹ ਵੀ ਮੰਨਦੇ ਨੇ ਜੋ ਸੇਗਾਰੇ ਜੋਤਿਸ਼ਾਲੀ ਮੰਨਦੇ ਉਹ ਵੀ ਮੰਨਦੇ ਨੇ ਗ੍ਰਹਾਂ ਦਾ ਫਰਕ ਪੈਂਦਾ ਗ੍ਰਹਾਂ ਦਾ ਫਰਕ ਪੈਂਦਾ ਆ ਜੋ ਸਾਂਝਾਲੇ ਮੰਨ ਲਈ ਸਕੇ ਇਹਦਾ ਮਤਲਬ ਉਹ ਵੀ ਇਹਨਾਂ ਨਾਲ ਬੇਸਿਸ ਸੰਸਾਰ ਹੈ ਕਈ ਗੱਲਾਂ ਦੀ ਜੋਤਿਸ਼ਾਲੇ ਸੰਸਾਰੇ ਨੂੰ ਕੇ ਹਾਂਜੀ ਕਈ ਕੋਟ ਖੰਡ ਕਈ ਕਈ ਕੋਟ ਖਾਣੀ ਆ ਖੰਡ ਕਈ ਕੋਟ ਆਕਾਸ਼ ਕਈ ਕੋਟ ਆਕਾਸ਼ ਪਰ ਕਈ ਕੋਟ ਆਕਾਸ਼ ਕਈ ਕੋਟ ਆਕਾਸ਼ ਗੱਲ ਹੈ ਇਹ ਆਕਾਸ਼ ਜਿਹਦੇ ਵਿੱਚ ਬ੍ਰਹਮਾ ਅੰਡਾ ਉਹ ਆਕਾਸ਼ ਹੈ ਬ੍ਰਹਮਾ ਅੰਡਾਲਾ ਆਕਾਸ਼ ਆਕਾਸ਼ ਬ੍ਰਹਮਾ ਅੰਡਾ ਜੋ ਅੰਡਾ ਪਰਮਤਵ ਦੇ ਪਿਛਲੇ ਕਾਸ਼ ਦੀ ਗੱਲ ਹੈ ਉਹ ਕਈ ਕਰੋੜ ਨੇ ਆ ਜੋ ਦੁਆਪਰ ਤੇ ਨਹੀਂ ਆਏ ਹੋਏ। ਆਕਾਸ਼ ਬ੍ਰਹਮੰਡ ਕੋਈ ਕੋਟ ਆਕਾਸ਼ ਬ੍ਰਹਮੰਡ। ਬ੍ਰਹਮੰਡ ਬ੍ਰਹਮੰਡ ਨੂੰ ਬ੍ਰਹਮੰਡ ਨਹੀਂ ਬ੍ਰਹਮੰਡ ਦਾ। ਬ੍ਰਹਮੰਡ। ਬਣਾਇਆ। ਬ੍ਰਹਮੰਡ ਪੜ੍ਹਨਾ। ਹਾਂ ਬ੍ਰਹਮੰਡ ਹੀ ਨਹੀਂ ਪੜ ਸਕਦੇ ਬ੍ਰਹਮੰਡ ਪੜ ਸਕਦੇ। ਬ੍ਰਹਮੰਡ। ਤਾਂ ਕੋਈ ਲੱਭਦੇ ਨਹੀਂ ਐ। ਮੰਡ ਤਾਂ ਕੋਈ ਲੱਭਦੇ ਨਹੀਂ। ਵੱਡਕੀ ਹੁੰਦਾ ਆਂਡਾ ਦਾ ਦੋ ਆਂਡਾ ਸੰਧੀ ਆਦੋਂ ਬ੍ਰਹਮ ਆਂਡਾ ਬ੍ਰਹਮ ਪ੍ਰਲਾਸ ਆਂਡਾ ਦੀ ਗੱਲ ਹੈ ਹਾਂ ਬ੍ਰਹਮ ਪ੍ਰਲਾਸ ਦੀ ਗੱਲ ਹੈ ਫ੍ਰੇਮ ਇੰਡ ਨਹੀਂ ਹੁੰਦਾ ਵੱਡਕੀ ਹੁੰਦਾ ਵੱਡਦਾ ਉਹਨੂੰ ਕਹਿਣਿਆ ਜਿਹੜਾ ਸਰਕਲੇ ਦੇ ਕੰਢੇ ਤੇ ਹੁੰਦਾ ਅਲਾਕਾ ਏਰੀਆ ਆਂ ਦਾ ਫੂਜੋ ਸਰਕੜਾ ਉਹਨੂੰ ਵੱਡ ਕਹਿੰਦੇ ਸਨ ਦੇ ਕੋਈ ਖੇਤੀ ਨਾਲ ਹੋ ਸਕਿਆ ਬਾਹਰ ਨਾ ਜਾ ਸਕਿਆ ਉਹ ਬੱਜਰ ਨਹੀਂ ਬੱਜਰ ਨਾਲ ਕਹਾ ਇਹਦੇ ਬਸ ਨੂੰ ਨੂੰ ਚੁੰਦੇ ਨੇ ਆਪ ਨੂੰ ਸੋ ਜਾਂਦਾ ਬੱਜਰ ਨਾਲ ਬੁਰਾ ਮਾਰਦੇ ਗਾ ਬ੍ਰਹਮਾ ਅੰਡਾ ਆਕਾਸ਼ ਦੇ ਵਿਚੋਂ ਦਾ ਆਪਣਾ ਕੋਈ ਆਕਾਸ਼ ਦੇ ਵਿੱਚ ਹੋਏ ਅੰਡੇ ਦੇ ਬਸ ਚੇਤਨਾ ਹੋ ਕਈ ਕੋਡ ਆਕਾਸ਼ ਕਈ ਬ੍ਰਹਮੰਡ ਕਈ ਕਰੋੜ ਆਕਾਸ਼ ਬ੍ਰਹਮੰਡ ਉਹ ਜੋ ਦੇ ਛੋਰੀ ਫਿੰਡੇ ਉਹ ਜਿਹੜਾ ਕਹਿੰਦਾ ਬ੍ਰਹਮੰਡ ਉਹ ਕਈ ਜ਼ਰੂਰ ਦੇ ਜਿਹੜੇ ਵਰ ਜਾਂਦੇ ਨੇ ਸੂਈ ਕੇ ਕਈ ਛੱਡਦੇ ਨੇ ਕਈ ਕਰੋੜ ਧਾਰਨ ਕਰਦੇ ਨੇ ਕਈ ਕਰੋੜ ਉਹ ਧਾਰਨ ਨੂੰ ਬੱਠੇ ਨੇ ਕੋਈ ਗਿਣਤੀ ਨਹੀਂ ਕਈ ਕਈ ਹੋਏ ਅਵਤਾਰ ਕਈ ਜੁਗਤੀ ਕਿੰਨੋ ਵਿਸਤਾਰ 24 ਅਵਤਾਰ ਨੇ ਕਹਿੰਦੇ ਕਈ ਕੋਟ ਹੋਏ ਅਵਤਾਰ ਉਹ ਤਾਂ 24 ਅਵਤਾਰ ਨੇ ਅਸਲ ਤੇ 12 ਅਵਤਾਰਾਂ 24 ਦੀ ਗੱਲ ਹੈ ਨਾਂ ਜਿਹੇ ਜਿਹੇ ਅਵਤਾਰ ਅਸੀਂ ਮੰਨਦੇ ਹਾਂ 10-12 ਨਾਲੇ ਉਹਨਾਂ ਦੀ ਗੱਲ ਹੈ ਉਹ ਜਿਹੜੇ 10-12 ਨਾਲੇ 10 ਅਵਤਾਰ ਨੇ ਇੱਥੇ ਸਾਡੇ ਕੋਲ ਰਿਕਾਰਡ ਵਿੱਚ 10 ਨੇ 24 ਨਹੀਂ ਉਹ ਇਹ ਕਹਿੰਦੇ ਕਈ ਕਰੋੜ ਹੋ ਚੁੱਕੇ ਸ਼ੁਰੂ ਤੋਂ ਲੈ ਕੇ ਉਹਨਾਂ ਦਾ ਸਾਡੇ ਕੋਲ ਰਿਕਾਰਡ ਹੈ ਜੀ ਉਹ ਰਿਕਾਰਡ ਰਿਕਾਰਡ ਵਾਲੇ ਜਿਹੜੇ ਸੀ ਉਹ ਰਿਕਾਰਡ ਵਾਲੇ ਦੱਸਦੇ ਸੀ ਜਿਹੜੇ ਗ੍ਰੰਥਾਂ ਲਿਖੇ ਹੋਏ ਨੇ ਜਿੰਨਾ ਰਿਕਾਰਡ ਹੈ ਨੀ ਪਿਛਲਾ ਸਾਡੇ ਕੋਲ ਕਿੰਨਾ ਕੁ ਰਿਕਾਰਡ ਹੈ ਇੱਥੇ ਮਹਾਲਵੇਖ ਮਿਲਦਾ ਕਿੰਨੇ ਕਹੇ 4 ਸਾਲ ਦਾ ਕਿੰਨੇ ਲੱਖ ਸਾਲ ਦਾ ਰਿਕਾਰਡ ਹੈ ਸਾਡੇ ਕੋਲ ਦੂਸਰੀ ਕੋਲ ਵੀ ਕਿੰਨਾ ਰਿਕਾਰਡ ਹੈ ਪੰਜਾਂ 6 ਸਾਲ ਤੋਂ ਪਹਿਲੀ ਹਿਸਟਰੀ ਹੋਣੀ ਆ ਨਾ ਕੋਈ ਕਾ ਇੱਦਾਂ 2000 ਸਾਲ ਤੋਂ ਰਿਕਾਰਡ ਹੈ ਜਿੱਦੋਂ ਪਹਿਲੇ ਕਰਤੀ ਹੈਗੀ ਸੀ اور باہر ہن سالا دز نہیں ہے اور ساڈے او گڈل ہے۔ یہ ریکارڈ ہے پچھلا بولدا۔ یہ وہ عادی بولدا کہ پیسے جھوندا رہندا۔ چار اڑو گادیا ایو ہے۔ ਜਾਗਿਆ ਜਿਹੜਾ ਜਾਗਿਆ ਉਹਨੂੰ ਸਾਰਾ ਪਤਾ ਲੱਗ ਜਾਂਦਾ ਹੈ ਇਹ ਅਪਰੰਪਰ ਇਹ ਨੂੰ ਹੋ ਪਾਇਆ ਅਪਰੰਪਰ ਹੋਤਾ ਆਇਆ ਸੁਤਾ ਪਿਆ ਨਹੀਂ ਦੱਸਦਾ ਜਾ ਕੇ ਤਾਂ ਦੱਸੂਏ ਜੇ ਸੁਤੇ ਨੂੰ ਪਤਾ ਜਾਗੇ ਪਤਾ ਲੱਗੂ ਹੈ ਕਈ ਤੋਂ ਕਈ ਯੁੱਗ ਤੀਨੋਂ ਵਿਸਤਾਰ ਕਈ ਝੁਕਤ ਕਈ ਝੁਕਤੀਆਂ ਨਾਲ ਬਸਾਰ ਕੀਤਾ ਹਾਲਫੇਸ ਆਰਕੀਟਾ ਮਾਇਆ ਦਾ ਅਗੇ ਧੋਕੇ ਲਓ ਜੀ ਤੇ ਕਈ ਝੁਕਤੀਆਂ ਨਾਲ ਕੀਤਾ ਕਈ ਵਾਰ ਪਸਰੋ ਪਸਾਰ ਸਦਾ ਸਦਾ ਇੱਕ ਕਈ ਵਾਰ ਪਸਰੋ ਪਸਾਰ ਸਦਾ ਲਪਸਾਰੇ ਨਾਲ ਕਈ ਵਾਰ ਹੋਇਆ ਹੈ ਪਹਿਲਾਂ ਸੰਸਾਰ ਛੋਟਾ ਹੁੰਦਾ ਰਿਹਾ ਵੱਡਾ ਪਤਾ ਹੁਣ ਆਬਾਦੀ ਵਾਦੀ ਹੈ ਤੇ ਕੋ ਕੋ ਇਫਸਾਰਾ ਹੈ ਗਿਆ ਕਦੇ ਆਦਮੀ ਜਗਰ ਤੇ ਰਹਿੰਦਾ ਸੀ ਥੋੜੀ ਆਬਾਦੀ ਸੀ ਕਈ ਵਾਰੇ ਪਸਾਰਾ ਪਸਰੇ ਕਈ ਵਾਰ ਪਸਰਿਓ ਸਦਾ ਸਦਾ ਇੱਕ ਪਰ ਪਸਾਰਾ ਹਮੇਸ਼ਾ ਜੀਣਾ ਦਾ ਕਈ ਵਾਰ ਸਾਹੀ ਪਸਰੇ ਪਸਾਰਾ ਹੋਇਆ ਖਤਮ ਹੋ ਗਿਆ ਦੁਬਾਰਾ ਫਿਰ ਪਸਾਰਾ ਹੋਇਆ ਫਿਰ ਪਰ ਇੱਕ ਓਮਕਾਰ ਹੈ ਲੋਧਦਾ ਜੀ ਸਦਾ ਸਦਾ ਇੱਕ ਇੱਕ ਓਮਕਾਰ ਇੱਕ ਓਮਕਾਰ ਇੱਕ ਓਮਕਾਰ ਵੀ ਸਦਾ ਰਹਿੰਦਾ ਇੱਕ ਓਮਕਾਰ ਰਹਦਾ ਹੈ ਕਰਨ ਵੇਲੇ ਲੋੜ ਪੈਂਦੀ ਉਹਦੀ ਓਮਕਾਰ ਦੀ ਜਦ ਬ੍ਰਹਮਾ ਨੂੰ ਪੈਦਾ ਕਰਨਾ ਹੈ ਫਿਰ ਓਮਕਾਰ ਦੀ ਲੋੜ ਪੈ ਹੋਣੀ ਹੈ ਪੈਦਾ ਇਹ ਓਮਕਾਰ ਤੇ ਓਮਕਾਰ ਬਣਦੇ ਉਹਨੇ ਓੰਕਾਰ ਬ੍ਰਹਮਾ ਉਤਪਤ ਇੱਕ ਓੰਕਾਰ ਦੇ ਓੰਕਾਰ ਦੇ ਵਿੱਚ ਆ ਕੇ ਬ੍ਰਹਮਾ ਪੈਦਾ ਹੋ ਗਏ ਓੰਕਾਰ ਦੇ ਅੰਦਰ ਇੱਛਾ ਹੈ ਇੱਕ ਓੰਕਾਰ ਦੀ ਇੱਛਾ ਨਹੀਂ ਹੈ ਕਿ ਕੰਗਕਾਰ ਕਰ ਇੱਕ ਓੰਗਾ ਇੱਕ ਓੰਕਾਰ ਸ਼ਰੀਰ ਹੈ ਹਉਲਾ ਇੱਕ ਅੰਗ ਅਕਾਰ ਅਕਾਰ ਇੱਕ ਅਕਬ ਵਧਾਉਂਦਾ ਹੈ ਜੀ ਸ਼ਬਦ ਹੈ ਜੀ ਜੋਤ ਹੈ ਇਕ ਕੰਗਾ ਅਗਾਰ ਜੋ ਲਾਈਟ ਹੈ ਪੂਰਨ ਰੂਪ ਹੈ ਇੱਛਾ ਅੰਦਰ ਕੋਈ ਨਹੀਂ ਪੂਰਨ ਬ੍ਰह्म ਦੇ ਅੰਦਰ ਜੇ ਇੱਛਾ ਪੈਦਾ ਹੁੰਦੀ ਹੈ ਇੱਕ ਓਮਕਾਰ ਹੋ ਜਾਂਦਾ ਹੈ ਸ੍ਰਿਸ਼ਟੀ ਪੈਦਾ ਹੁੰਦੀ ਹੈ ਫਿਰ ਬੜਿਆ ਨਾ ਇੱਕ ਤੇ ਦੋ ਰੂਪ ਹੋ ਗਿਆ ਨਾ ਹੋਇਆ ਉਹ ਫਿਰ ਹੋਣ ਲੱਗਦਾ ਹੈ ਚੇਤਨ ਜੇ ਫਸਾਰਾ ਹੁੰਦਾ ਫੇ ਜੜ ਦੇ ਵਿੱਚ ਸਾਚੇ ਦੇ ਪਪਨਾ ਪਿਆ ਉਹ ਬਿਹਾਰਾਂ ਵੀ ਸੇਹਾਂ ਸਾਚੇ ਪਗਨਾ ਤੇ ਜਲ ਹੋਏ ਜਲ ਦੇ ਵਿਚੁਰ ਨੂਰ ਪਿਆ ਉਹਦੀ ਜਿਹੜੀ ਤ੍ਰਿਸ਼ਨਾ ਪਿਆਸ ਆ ਉਥੋਂ ਤੱਕ ਲੂਰੀ ਹਾਂਜੀ ਇਹ ਕੋਟ ਕਿਨੇ ਬਹੁਤ ਹੋਏ ਪਰ ਉਹ ਮਹੇਸ਼ਾ ਮਾਤ ਕਈ ਕਰੋੜ ਕੀ ਨੇ ਉਹ ਪਾਂਤ ਕਈ ਕਰੋੜ ਕੀ ਬਹੁਤ ਪ੍ਰਕਾਰ ਦਾ ਪੈਦਾ ਕੀਤਾ ਹੈ ਜਿਵੇਂ ਬੱਚਿਆਂ ਨੇ ਦੁਨੀਆ ਪਰਤੋਕ ਦੀ ਬੱਚੀ ਹੋਵੇ ਸਭ ਦਾ ਨਵ ਬੱਚੀ ਹੋਵੇ ਸਪਨੇ ਕਿੰਨੇ ਪ੍ਰਕਾਰ ਦੇ ਸਪਨੇ ਕਿਹੜੇ ਨੇ ਕਿੰਨੇ ਪ੍ਰਕਾਰ ਦੇ ਕੀੜੀਆਂ ਕੀੜੇ ਇਸ ਸਖ ਇਸ ਕਰਕੇ ਇਪੋਡਿਕੇ ਸੁਦੇਜੀ ਸਿੱਨਹੀ ਪ੍ਰਸਾਰਦੇ کئی ਕੋਟ ਕਿੰਨੇ ਬਹੁਤ ਬਹੁਤ ਬਹੁਤ ਬੱਧੀ ਪ੍ਰਭ ਤੇ ਹੋਏ ਪਰਮ ਮਹੇਸ਼ਮਾ ਪ੍ਰਭ ਤੇ ਹੋਏ ਪ੍ਰਭ ਰੇਸ਼ਮਾ ਇਹ ਜਿਹੜਾ ਗਿਆਨ ਤੋਂ ਪੈਦਾ ਹੁੰਦੇ ਨੇ ਇਹ ਸਾਰੇ ਬਹੁਤ ਆਉਂਦੇ ਜੀਵ ਵੀ ਬਹੁਤ ਦਾ ਗਿਆਨ ਬਹੁਤ ਦਾ ਉਹਨਾਂ ਕੋਲ ਪ੍ਰਗਿਆਨ ਵੀ ਉਹ ਕਹਿੰਦਾ ਹੀ ਹੈ ਯਾਰ ਹਰ ਜਗਾ ਪ੍ਰਪਤੇ ਹੋਏ ਪਰਮਾਇਸ ਮਤ ਉਹ ਪ੍ਰਪਤੇ ਹੀ ਪੈਦਾ ਹੁੰਦੇ ਨੇ ਜੀਵ ਪ੍ਰਪਤੇ ਵਿੱਚ ਹੀ ਸਮਾ ਜਾਂਦੇ ਨੇ ਜਿਹੜੀ ਜਿਹੜਾ ਜੀਵ ਤਾਹੋ ਮਤਲਬ ਹੈ ਜਿਹੜੇ ਜੀਵ ਦੇ ਵਿੱਚ ਜਨਮ ਲੈ ਲੈਂਦਾ ਉਹਦਾ ਫਿਰ راستੀ ਉਹਨੂੰ ਲੋੜ ਨਹੀਂ ਦੇਦੀ ਸ੍ਰੀ ਛੱਡਣ ਵੇਲੇ ਚਾਹੇ ਉਹਦਾ ਜੀਵ ਹੀ ਕਰਦਾ ਪਰ ਜੇ ਛੱਡ ਦਿੰਦਾ ਉਹਦੇ ਬਾਅਦ ਦੁਆ ਜਨ ਉਹਦੇ ਵਿੱਚ ਨਹੀਂ ਲੈਣਾ ਚਾਹਦਾ ਆਦਮੀ ਵੀ ਦੁਆ ਜਨਮਾਂ ਦੀ ਜਨਮ ਲੈਣਾ ਚਾਹੁੰਦਾ ਹੱਲੇ ਉਹ ਜਨਮ ਹੈ ਦੀ ਉੱਪਰ ਉਹ ਹੈ ਦੀ ਹਾਂ ਉਹ ਤੋਂ ਬਾਅਦ ਹੋਰ ਇਚਨਾ ਆਉਣੀ ਹੋਰ ਹੋਇਆ ਜਾਂ ਜੇ ਆਦਮੀ ਦਾ ਜਨਮ ਨਹੀਂ ਲੈਣਾ ਚਾਹੁੰਦਾ ਨਾਲ ਆਦਮੀ ਦਾ ਜਨਮ ਵੀ ਨਹੀਂ ਲੈਣਾ ਚਾਹੁੰਦਾ ਫਿਰ ਹੋਰ ਕੋਈ ਜਨਮ ਹੈ ਦੀ ਉੱਤੇ ਉੱਤੇ ਤਾਂ ਹੈ ਨਹੀਂ ਕੋਈ ਬਾਹਰ ਬਖਸ਼ ਬੰਦੇ ਕੋ ਬਹਾਨਾ ਬਣਾ ਤਾਂ ਕੋਈ ਵੀ ਨਹੀਂ ਜਾਣਾ ਚਾਹੁੰਦਾ ਲੇ ਜੇ ਕੋਈ ਚਾਹੁੰਦਾ ਇਦੀ ਕਿ ਆਦਮੀ ਦਾ ਜਨਮ ਨਹੀਂ ਮੁੜ ਕੇ ਚਾਹੁੰਦਾ ਹੈ। ਉਹ ਗੈਰਸਪਸਪਤ ਆਦਮੀ ਦੇ ਜਨਮ ਜਨਮ ਲਾਟੇ ਕਿ ਜਿੱਦੀ ਤਕਲੀਫ ਕੱਟੀ ਜਿੱਦਾਂ ਜੀਵਨ ਕੱਟੀ ਕੀ ਹੈ ਇਹ ਜਨਮ ਐਸ ਕਿਦਾ ਫੇਟੇ ਖਾਰੇ ਵੀ ਰਹਿਮਤੋਂ ਪਰ ਆ ਭੈੜੇ ਹੁੰਦੇ ਰੋ ਥੱਲੇ ਵਾਲੇ ਨੂੰ ਦੇਖੂਗਾ ਜਿਹੇ ਜਮਨ ਕੇ ਫੇਟ ਸਮਾਪਤੀ ਕਰਦੇ ਹਾਂ ਤੇ ਕਹਿੰਦੇ ਪਹਿਲਾਂ ਕੇ ਆਉ। ਚੌਕਾ ਇਹ ਹੈ। ਇਸ ਤੇ ਆ ਕੇ ਫਿਰ ਚੌਕਾ ਜੀ ਛੱਡ। ਇਹ ਜੇ ਜੰਮਦਾ ਕੀਤੀ ਕੋਸ਼ਿਸ਼ ਕਰਕੇ ਕਿੰਨੀ ਜਦੋਂ ਜਾਹਰ ਨਾਲ ਰੋਟੀ ਖਾਦੇ ਆ ਕੀਤੀ ਹੈ। ਕੀ ਬਲੈ ਸਦਾ ਜਾਣੂ ਕਿ ਕੇ ਬਾਬਾ ਆਪਣੇ ਬਸਰੇ ਗਾਉ। ਛੇ ਅਗਲਾ ਦੇਖੋ ਲੋ ਕੋਚਾ ਹੋਏ ਉਹ ਕਹਿੰਦਾ ਇਹ ਨੂੰ ਰਹਿਂਦਾ ਅਗਲਾ ਦੇ ਹੁਣ ਬੁਰੀ ਕੀ ਦਿੰਦੇ ਇਦੋਂ ਬਾਹਰ ਦਾ ਤੇ ਤਾਂ ਮਾਲੇ ਨੂੰ ਨਾ ਭਾਲਦਾ ਇਹ ਪੰਮੂ ਜਿਹਨੇ ਭਾਲਦਾ ਤੇਰਾ ਸਭ ਕੁਝ ਖਾ ਲਿਆ ਹੁਣ ਆਨੰਦ ਆ ਜੀ ਦੱਸ ਆਨੰਦ ਆ ਜੀ ਕੀ ਹੁੰਦਾ ਜਦੋਂ ਭੁੱਖ ਦਾ ਘਾਦਾ ਕੋਈ ਵੀ ਕੋਈ ਸੁਆਦ ਹੈ ਜਦ ਆਨੰਦ ਆਜੀ ਕਹਤਾ ਜੋਸ ਪਦਾਰਥ ਖਾ ਗਏ ਆਨੰਦ ਆਜੀ ਜਗਾ ਤਾ ਨਾ ਤੇ ਬਾਦ ਹੁੰਦਾ ਸਕੀਰ ਦਾ ਪਰਮਨੰਦ ਵੇ ਫਿਰ ਮਾਇਆ ਤੋਂ ਤਾਂ ਆਨੰਦ ਆਨੰਦ ਮਾਇਆ ਤੋਂ ਹੁੰਦਾ ਜਦੋਂ ਸਾਨੂੰ ਭੁੱਖ ਨਹੀਂ ਰਹਿੰਦੀ ਰੋਟੀ ਦੀ ਜੋ ਖਾਣੇ ਆ ਅਸੀਂ ਕਹਿੰਦੇ ਆ ਆਨੰਦ ਆਨੰਦ ਹੁੰਦਾ ਸਿਰ ਮਾਇਆ ਤੋਂ ਪਰਮ ਆਨੰਦ ਹੁੰਦਾ ਨਾਮ ਬਿਣੇ ਤੋਂ ਨਾਮ ਦੇ ਖਾਦੇ ਤੋਂ ਤੇਸ ਤੋਂ ਰਸ ਤੋਂ ਪਰਮ ਆਨੰਦ ਹੁੰਦਾ ਹੈ ਮਾਇਆ ਦੇ ਤੇਸਾਂ ਤੋਂ ਜਦੋਂ ਉੱਪਰ ਉੱਠ ਜਾਈਦਾ ਉਦੋਂ ਅਨੰਦ ਹੁੰਦਾ ਹੈ ਉੱਪਰ ਛੱਡਣਾ ਨਾ ਆਨੰਦ ਦਾ ਹੋ ਰਹੀ ਗਿਆ ਮਾਇਆ ਦੇ ਪਦਾਰਥਾਂ ਦੇ ਕੇਸ ਤੋਂ ਉੱਪਰ ਉੱਠ ਜਾਣਾ ਇਹਨਾਂ ਨਾਲ ਕੋਈ ਲਗਾਉਂ ਨਾ ਰਹਿਣਾ ਵੀ ਸਰੀਰ ਦਾ ਛੱਡੋ ਪਰੇ ਰੋਟੀ ਮੇਰੀ ਕਾਟ ਤਾਂ ਹੀ ਕਹਿੰਦਾ 라ਬਣ ਮੇਰੀ ਭੁੱਖ ਤਬੀਰ ਵੀ ਕਹਿੰਦਾ ਵੀ ਚਾਹੇ ਜਾਓ ਕਿ ਪੂਸੀ ਜਦੋਂ ਖੜਾਉ ਥੱਲੇ ਆਵੇ ਥੱਲੇ ਹੁੰਨਦਾ ਜੁਬੜਾ ਠੀਕ ਹੈ ਸਰੀਰ ਹੈ ਫਿਰ ਉਹ ਉਲੜਦੀ ਜਾਂਦੀ ਹੈ ਚੱਲਣ ਵਾਸਤੇ ਕਾ ਜੋ ਉਲੜਦੀ ਹੈ ਸਵਾਰਦਾ ਹੀ ਹੈ ਕਾਲੇ ਵਿੱਚ ਉਹ ਨਰਦੀ ਮਿਲਦੀ ਹੈ ਤੂੰ ਚੱਲਣ ਵਾਸਤੇ ਬਸ ਹਾਂ ਤਾ ਕਾ ਅੰਤ ਨਾ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਖੁਦਾ ਅੰਤ ਨਹੀਂ ਕੋ ਜਾਣਦਾ ਹੰਸ ਕੇ ਮੈਂ ਜਾਣਦਾ ਉਹ ਜਿਹੜਾ ਹੋਵੇ ਤਾਂ ਜਾਣੇ ਜਿਹਦਾ ਅੰਤ ਹਈ ਨਹੀਂ ਜਾਣੇ ਕਿਉਂ ਕਿਸੇ ਨੇ ਅਜ ਤੱਕ ਉਹਦਾ ਅੰਤ ਨਹੀਂ ਲਿਆ ਜਾਣਦਾ ਹੁੰਦਾ ਕੋ ਲਿਖ ਦਿੱਤਾ ਕਿਸੇ ਨੇ ਅਜ ਤੱਕ ਉਹਦਾ ਅੰਤ ਨਹੀਂ ਦੱਸਿਆ ਜੇ ਕੋ ਜਾਣਦਾ ਹੁੰਦਾ ਤੂੰ ਜੇ ਉਹ ਆਖਾਂ ਜੇ ਉਹ ਜਾਣਾਂ ਆਖ ਨਹੀਂ ਜੇ ਤਾਂ ਮੈਂ ਜਾਣਦਾ ਹੁੰਦਾ ਮੈਂ ਤਾਂ आगी। आगी। कई कोट पार ब्रह्म के दास सादा अर्dna जाने कोई आपे आप नानक परस होए इस करके के ए आपे आप जीव जीव दातने होई ए आप रहंदा है इसे इसी दी गल है ते, ते कंकार ਉਹ ਚਾਹੇ ਕਾਰ ਥੋੜਾ ਜਿਹਾ ਜੇ ਮਤਲਬ ਹੈ ਅ ਕੁਝ लॉस ਦੇ ਵਿੱਚ ਰਹਿੰਦਾ ਚਾਹੇ ਗਿਆਨ ਘਟਦਾ ਹੁੰਦਾ ਪੂਰਾ ਹੁੰਦਾ ਉਹ ਕੋਈ ਫਰਕ ਨਹੀਂ ਇਹ ਗਿਆਨtar ਗਿਆਨ ਘਟਦਾ ਵੱਧਦਾ ਰਹਿੰਦਾ ਇਹਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ ਇਹ ਜ਼ਰੂਰ ਦੀਵਾ ਨਹੀਂ ਬੋਲਦਾ ਦੀਵਾ ਜਲਦਾ ਐਨਸ ਦੀਵਾ ਬੜੇ ਬੱਥੇ ਕੋ ਐਨਸ ਦੀਵਾ ਬੜੇ ਅੱਤਕ ਦੀਵਾ ਤਾਂ ਰਾਤ ਵਰਦਾ ਹੀ ਜਾਂਦਾ ਦੀਵਾ ਨੀ ਬਟੋ ਬੋਝਾ ਹਟੇਗੀ ਹਾ ਲੋ ਲੋ ਥੋੜੀ ਹੈ ਲੋ ਜਿਆਦਾ ਕੋਈ ਗੱਲ ਨਹੀਂ ਜੀ ਰੋਸ਼ਨੀ ਕਿੱਥੇ ਤੱਕ ਜਾਂਦੀ ਉਹ ਗੱਲ ਅਲੱਗ ਹੈ ਦੀਵਾ ਬਾਂਤ ਰਹੇ ਹੋ ਬੇਨਾ ਤੇਲ ਤੇ ਫਿਰ ਨਹੀਂ ਦੀਵਾ ਬੰਦ ਕੇ ਧਰਿਆ ਹੋਇਆ ਹੈ ਬਿਲਾਹ ਮਰ ਕੇ ਸੰਸਾਰ ਆਹ ਐਸਾ ਦੀਵਾ ਆਪਣਾ ਸੰਸਾਰ ਹੈ ਹਮਾਰਾ ਇਹ ਦੀਵਾ ਜੇ ਦੀਵਾ कदों ਦੇਗੀ ਹਾਂਜੀ ਤਾਕਾ ਅੰਤ ਨਾ ਜਾਣੇ ਕੋਏ ਆਪੇ ਆਪ ਲਾਉਂਦਾ ਕਦੋਂ ਦਾ ਦੀਵਾ ਜਲਿਆ ਹੈ ਜਿਹਨੇ ਬਣਾਇਆ ਇਹ ਨਹੀਂ ਕਿਸ ਨੂੰ ਪਤਾ ਕਦੋਂ ਤੱਕ ਜਲੂਗਾ ਇਹ ਵੀ ਨਹੀਂ ਪਤਾ ਕਿਸ फेर ਕਿ ਥੋੜ੍ਹ ਕੇ ਕੋਈ ਨਹੀਂ ਜਾਂਦਾ ਹਾਂਜੀ ਨਾਨਕ ਦਾ ਦਾਤਾ ਅੰਤ ਨਾ ਜਾਣੇ ਕੋਈ ਨਾਨਕ ਦਾ ਦਾਤਾ ਅੰਤ ਨਾ ਆਪੇ ਆਪ ਜਾਣੇ ਕੋਈ ਜੀਵ ਦਾ ਕੋਈ ਆਪ ਨਾਨਕ ਪ੍ਰਭ ਕਹਿੰਦੇ ਜਿਹੜਾ ਜੀਵ ਹੈ ਆਪੇ ਆਪ ਰੰਤ ਹੈ ਕੋਣ ਬ੍ਰਹਮ ਹੋਈ ਸ਼ਰ ਰੰਤ ਹੈ ਇਹ ਕੋਣ ਹੈ ਨਨ ਆਪੇ ਆਪ ਨਾਨਕ ਪ੍ਰਭ ਸੋਏ ਨਾਗ ਦਾ ਪ੍ਰਭ ਨਾਮ ਸਵੇ ਆਪੇ ਆਪ ਰਹਿੰਦਾ ਏਕ ਓਕਾਰ ਦੇ ਰੂਪ ਚ ਰਹਿੰਦਾ ਏ ਓਕਾਰ ਦੇ ਰੂਪ ਚ ਉਹ ਨਾ ਚੱਲਦਾ ਨਾ ਉਹ ਤਾਂ ਪੈਦਾ ਹੁੰਦਾ ਹੁਕਮ ਹੁੰਦਾ ਹੀ ਨਹੀਂ ਹੈ ਜਦ ਸਾਨੂੰ ਸਮਾਨ ਲਗਾਉਂਦਾ ਉਹ ਹੁਕਮ ਤੇ ਹੁੰਦਾ ਹਾਕਮ ਹੁੰਦਾ ਹਾਕਮ ਇੰਪੋਰਟੈਂਟ ਹੈ ਹੁਕਮੋਂ ਤੇ ਇੰਪੋਰਟੈਂਟ ਨਹੀਂ ਹੈ ਹੁਕਮ ਦੀ ਇੰਪੋਰਟੈਂਸ ਸਿਰਫ ਉਦੋਂ ਤੱਕ ਆ ਜਦੋਂ ਤੱਕ ਸੰਸਾਰ ਹੈ ਫਿਰ ਹੁਕਮ ਵੀ ਦਾ ਹਾਕਮ ਨਹੀਂ ਹੈ ਹਾਕਮ ਨਹੀਂ ਹੁਕਮ ਹੈ ਫਿਰ ਹਾਕਮ ਇੰਪੋਰਟੈਂਟ ਹੈ ਹੁਕਮ ਦਾ ਕਰਤਾ ਹੈ ਉਹ ਜੋ ਕਰ ਹੁਕਮ ਦਾ ਉਹ ਪੀਤਾ ਹੋਇਆ ਪੈਦਾ ਕੀਤਾ ਹੋਇਆ ਕ੍ਰੀਏਟਰ ਹੁਕਮ ਦਾ ਵੀ ਹਾਕਮ ਹੈ ਕੂਣ ਬਣਾਉਂਦਾ ਹੈ ਉਹ ਸੁਪਰੀਮ ਹੁਕਮ ਰੱਬ ਦਾ ਕ੍ਰੀਏਟਰ ਹੱਥ ਵਿੱਚ ਹੁੰਦਾ ਕ੍ਰੀਏਟਰ ਉਹ ਕੋ ਹੈ ਏ ਠੀਕ ਹੈ ਦੁਨੀਆ ਵਿੱਚ ਹੁਕਮੇ ਵਰਤਦਾ ਬੁਗਣਾ ਸਭ ਕੁਝ ਹੁੰਦਾ ਹੈ ਪਰ ਜੀ ਜਿਹਦੇ ਹੁਕਮ ਨਾਲ ਸਭ ਕੁਝ ਹੁੰਦਾ ਉਹ ਹਾਕਮ ਦੀ ਇੰਪੋਰਟੈਂਸ ਹੁਕਮੋਂ ਘੱਟ ਹੈ ਹਾ ਕਉਦੀ ਇੰਪੋਰਟ ਕੀ ਹੁਕਮ ਨੂੰ ਕਰਦਾ ਬੱਦ ਦਾ ਕਉਦੀ ਇੰਪੋਰਟ ਉਹ ਕੇ ਮੈਂ ਆਉਂਗੀ ਰੋਦਾ ਹੀ ਹੈ ਜਿੰਨਾ ਕਾ ਸੀ ਉਹਦਾ ਹੁਕਮ ਦੇਖਦੇ ਆ ਉਹਦੇ ਬਾਅਦ ਤਾਂ ਚਾਰ ਖਾਣੀਆਂ ਕਹਿੰਦੇ ਤੇ ਕੰਨ ਕਈ ਕੋਟ ਖਾਣੀਆਂ ਹਾਂਜੀ